ਲੋਕ ਮਹੱਲਾ ਤੀਜਾ ਗੁਰਮੁਖੀ ਮਲਾਰ ਰਾਗ ਜੋ ਕਰੈ ਤਿੰਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਬਿਸ਼ਾਣਿਆ ਏਕੋ ਸੱਚਾ ਸੋਈ ਰਾਗ ਕਾਸਾ ਕਰਨਾ ਚਾਹੀਦਾ ਉੱਤੇ ਤਾਂ ਰਾਗ ਘਟਦਾ ਨੂੰ ਰਾਗ ਦਾ ਮਤਲਬ ਆ ਬੋਲਣਾ ਕੁਝ ਬੋਲਣਾ ਵਿਚਾਰਨ ਕਰਨਾ ਰਾਗ ਕਹਿੰਦੇ ਆਪਾਂ ਉੱਤੇ ਕਿਹਾ ਸੀ ਮਲਹਾਰ ਹੁੰਦਾ ਮਲਾਰ ਨਹੀਂ ਹੁੰਦਾ ਹਾਂ ਹਾਂ ਮਲਹਾਰੇ ਹੈ ਅੱਛਾ ਜੀ ਇਹ ਰਾਗ ਦਾ ਬਹੁਤ ਲੌਂਹ ਕੁਛ ਬੋਲਣ ਉਹ ਬੋਲਣ ਦੀ ਇੱਛਾ ਜੋ ਜੋ ਇੱਛਾ ਹੋਵੇ ਉਹ ਹੀ ਬੋਲਦਾ ਠੀਕ ਹੈ ਜੀ ਬੋਲਣ ਦੋ ਹੁੰਦੀਆਂ ਮਲਹਾਰ ਰਾਗ ਜੋ ਕਰੈ ਤਿੰਨ ਮੰਨ ਤੋ ਸੀਤਲ ਹੋਈ ਉਹਨਾਂ ਦਾ ਮਨ ਤਾਂ ਸੀਤਲ ਹੋ ਜਾਂਦਾ ਉਹ ਬਲਦੇ ਹਲਣ ਦੀ ਇੱਛਾ ਰੱਖਦੇ ਨੇ ਗੱਲ ਵੀ ਐਸੀ ਕਰਦੇ ਨੇ ਜੀ ਨਾਲ ਮਨ ਦੀ ਹੈ ਜੀ ਚਾਹੇ ਬੋਲਦੇ ਨੇ ਚਾਹੇ ਉਹ ਇੱਛਾ ਰੱਖਦੇ ਨੇ ਉਹਦੇ ਨਾਲ ਹਰਦੀ ਮੈਲ ਜਿਹੜੀ ਹੈਗੀ ਦੂਰ ਹੁੰਦੀ ਹੈ। ਪਰ ਉਹਨਾਂ ਦਾ ਫਿਰ ਤਰਬੁਲ ਚੀਤਲ ਹੋ ਜਾਂਦਾ। ਪਰ ਤਨ ਚੀਤਲ ਹੋ ਜਾਂਦਾ। ਇਹ ਰਾਹ ਕਰਨਾ ਚਾਹੀਦਾ। ਆ ਗੁਰਬਾਣੀ ਬੋਲ ਕੇ ਕਰੀ ਹੋਈ ਹੈ। ਕਾਗਿ ਦੀ ਉਹ ਚਾਰਟ ਕਰੀ ਹੋਈ। ਬੋਲ ਕੇ ਚਾਰਟ ਕਰੀ ਹੋਈ। ਬੋਲ ਕੇ ਲਿਖਾਈ ਹੋਈ ਹੈ ਜਾਂ ਲਿਖਤ ਵਿੱਚ ਆਈ ਹੈ ਤਾਂ ਬੋਲ ਕੇ ਹੀ ਲਿਖੀ ਹੈ ਜੇ ਆਪਾਂ ਬੋਲਦੇ ਹਾਂ। ਜੇ ਪਾਠ ਕਰਦੇ ਹਾਂ, ਪੜ੍ਹਦੇ ਹਾਂ, ਨਹੀਂ ਤਾਂ ਇਹਨੂੰ ਗੌਣ ਗਾਈ ਹੁਕਮਤ ਦਾ ਫਿਰ ਪਾਠ ਕਰਨਾ ਹੁਕਮਤ ਦਾ ਹੁੰਦਾ। ਸਭ ਗੁਰ ਸ਼ਬਦੀ ਇੱਕ ਪਛਾਣਿਆ ਇੱਕੋ ਸੱਚਾ ਸੋਈ ਗੁਰ ਸ਼ਬਦੀ ਇੱਕ ਪਛਾਣਿਆ ਜਿਹੜਾ ਗੁਰੂ ਚ ਸ਼ਬਦ ਹੈ ਨਾ ਉਪਦੇਸ਼ ਹੈ ਇਹਦੇ ਨਾਲ ਪਛਾਣ ਲਿਆ ਇੱਕ ਕੀ ਸੁਭਾਅ ਆਪਣਾ ਆਪੇ ਪਛਾਣਨਾ ਹੈ ਕਾੜ ਮਨ ਪਛਾਣਨਾ ਮਨ ਦੇ ਵਿੱਚੋਂ ਇਹ ਤਾਂ ਮੂਲ ਪਛਾਣਨਾ ਇੱਕ ਦੋਏ ਅੰਦਰ ਬਾਹਰ ਦਾ ਇੱਕੋ ਹੋਵੇ ਅੰਦਰ ਬਾਹਰ ਇੱਕੋ ਜਨ ਇੱਕੋ ਸਤਿ ਸਭਾਈ ਇੱਕ ਹਰਿ ਦੂਜਾ ਨਾਨਕ ਇੱਕ ਸਮਾਈ ਪਛਾਲਿਆ ਇੱਕੋ ਸੱਚਾ ਸੋਇ ਔਰ ਸੱਚਾ ਜਣਾ ਹੋ ਵੀ ਇੱਕ ਹੀ ਹੈ ਸਰਕਾਰ ਦੇ ਸਾਰੇ ਇੱਕ ਸਾਰੇ ਗੁੱਲ ਤੋਂ ਬੂਹੂ ਦੇ ਕੋਲ ਦੀ ਹੈ ਭਾਵੇਂ ਸਾਗਰ ਵੀ ਨਾ ਇੱਕੋ ਸੱਚਾ ਸੋਇ ਹਾਂਜੀ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤੀ ਹੈ ਸਹਿਜ ਹੀ ਪਤ ਹੋਈ ਮਨ ਤਾਂ ਸੱਚਾ ਮਨ ਕਰਕੇ ਸੰਨ ਕਰਕੇ ਸੱਚ ਹੈ ਸੱਚ ਮੰਨ ਵਾਅਦੇ ਵਿੱਚ ਵੀ ਸੱਚ ਹੋਈਏ ਬਹੁਤ ਮੈਂ ਸਾਗਰ ਸਾਗਰ ਮਹਿਬੂਤ ਉੱਤੇ ਸੱਚਾ ਹੈ ਤੇ ਸੱਚ ਨੂੰ ਕਰਨ ਵਰਤਨ ਸੱਚਾ ਉੱਤੇ ਸੱਚਾ ਹੋ ਗਿਆ ਜੀ ਇੱਕ ਬਹੁਤ ਸੱਚਾ ਉਹਦੇ ਨਾਲ ਸੱਚਾ ਗਿਆ ਸੱਚ ਮੰਨ ਮੰਨ ਵਿੱਚ ਸੱਚ ਹੈ ਸੱਚੇ ਸੱਚੀ ਚੋਏ ਸੱਚੇ ਦੀ ਜਿਹੜੀ ਕਹੀ ਹੋਈ ਸ਼ੋਭਾ ਹੁੰਦੀ ਹੈ ਇਹਨੇ ਗੱਲ ਕਹੀ ਹੁੰਦੀ ਹੈ ਜੋ ਗੱਲ ਕਰਦਾ ਉਹ ਵੀ ਸੱਚੀ ਹੁੰਦੀ ਹੈ ਜੇ ਸੋਭਾ ਕਿਸੇ ਦੀ ਕਰਦਾ ਉਹ ਸੱਚੀ ਕਰਦਾ ਝੂਠੀ ਸੋਭਾ ਨਹੀਂ ਕਰਦਾ ਕਿਸੇ ਦੀ ਸੱਚੀ ਦੀ ਸੋਭਾ ਜੇ ਕਰਦਾ ਉਹ ਸੱਚੀ ਹੀ ਹੁੰਦੀ ਹੈ ਸੱਚੀ ਭਗਤੀ ਹੈ ਉਹਦੇ ਅੰਦਰ ਭਗਤੀ ਹੈ ਜਿਹੜੀ ਉਹ ਵੀ ਸੱਚੀ ਹੈ ਸੱਚ ਜੋ ਕਹਿ ਰਿਹਾ ਸਹਿਜ ਹੀ ਪੱਥ ਕੋ ਟਿਕਿਆ ਹੋਇਆ ਹੈ ਜਾਗਰਤ ਵਸਤੂ ਵਿੱਚ ਹੈਗਾ ਸਹਿਜ ਰਸਤਾ ਵਿੱਚ ਹੈਗਾ ਇਸ ਕਰਕੇ ਉਹਦੀ ਪੱਤ ਇੱਜ਼ਤ ਹੈ ਉਹਦੀ ਗੱਲ ਕਹੀ ਹੋਈ ਨੂੰ ਲੋਕ ਸੁਣਦੇ ਨੇ ਔਰ ਉਹਨੂੰ ਮਨਤਾ ਵੀ ਦਿੰਦੇ ਨੇ ਜੇ ਸੁਣ ਕੇ ਜਿਹੜੀ ਗੱਲ ਨੂੰ ਮਨਤਾ ਮਿਲਦੀ ਹੈ ਉਹਦੀ ਇੱਜ਼ਤ ਹੋ ਜਾਂਦੀ ਹੈ ਜਿਹੜੀ ਸੁਣ ਕੇ ਗੱਲ ਰੱਦ ਹੋ ਜਾਂਦੀ ਹੈ ਉਹਦੀ ਪ੍ਰਤੀਕਿਰਿਆ ਹੋ ਜਾਂਦੀ ਗੱਲ ਸੁਣ ਲਈ ਔਰ ਰੱਦ ਕਰਤੀ ਲੋਕਾਂ ਦੱਦੇ ਇਹ ਨਹੀਂ ਠੀਕ ਹੈ ਉਹਦੀ ਇੱਜ਼ਤ ਨਹੀਂ ਜਾਂਦੀ ਹਾਂਜੀ ਕਾਲ ਯੁਗ ਮਹਿ ਅੰਧਾਰ ਹੈ ਮਨਮੁਖ ਰਾਹ ਨਾ ਕੋਈ ਸੇਵਕ ਭਾਗੀ ਨਾਨਕਾ ਜਿਨ ਗੁਰਮੁਖੀ ਪ੍ਰਗਟ ਹੋਈ ਕਾਲ ਯੁਗ ਮੈਂ ਜਿੱਥੇ ਕਲਪਨਾ ਅੰਦਰ ਭਾਇਦੀ ਭੁੱਖ ਹੈ ਸਰ ਉਹ ਹੈ ਬਹੁਤ ਬੰਦਾ ਘੋਟੀਆਂ ਨੇ ਸੇਵਾ ਥੋੜੀ ਹੈ ਉਹ ਕਾਲ ਯੁਗ ਉਹਦੇ ਅੰਦਰ ਜੇ ਪ੍ਰਿਆ ਨਹੀਂ ਹੋਇਆ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਜਿਹੜਾ ਆਪਣੇ ਮੋੜ ਨਾਲ ਹੀ ਮਿਲਿਆ ਉਹ ਕਲਪਣਾ ਕਰਦਾ ਭਾਇਆ ਪਿੱਛੇ ਦੌੜਨਾ ਔਰ ਕੋਹਰਾਂ ਨਾਲ ਆ ਰਿਹਾ ਉਹਦੇ ਤੇ ਅਗਿਆਨਤਾ ਦਾ ਮੇਰਾ ਕੋਹਰ ਮੇਰਾ ਅਗਿਆਨਤਾ ਦਾ ਪਰ ਮੁਕਰਾਂ ਨਾ ਕੋਈ ਪਰ ਮੁਕਰੋ ਉਹ ਉਹ ਕਿਸੇ ਰਸਤੇ ਦਾ ਕੋਈ ਗਿਆਨ ਨਹੀਂ ਸਾਣਾ ਪੱਜਾ ਫਰੀ ਜਾਂਦਾ ਉੱਥੇ ਦੀ ਦੌਰ ਤੇ ਉਹ ਤਾਂ ਕਿਸੇ ਵਕਤ ਵੀ ਕੋਠੇ ਤੋਂ ਪੈਸਲ ਲੇ ਗਿਆ ਗੁਰਦਸਪੁਰ ਡਿਕਪੜੇ ਉਹਨੂੰ ਕੋਈ ਸੋਚੀ ਨਹੀਂ ਹੈ ਕੋਈ ਰਾਹ ਨਹੀਂ ਰਾਹ ਹੀ ਤੋਂ ਕੋਈ ਰਾਹ ਦਾ ਗਿਆਨ ਨਹੀਂ ਹੈ ਕਿ ਉਹ ਧਰਮ ਦੇ ਕਰਨ ਵੀ ਕਰਦਾ ਕਰਾਹੇ ਉਹ ਆਪਣੀ ਮਰਜ਼ੀ ਦੇ ਕਰਦਾ ਕਿਸੇ ਰਾਹ ਨਹੀਂ ਹੈ ਸੇਵਟ ਕਰਦੀ ਨੋਨਕਾ ਨਾਲ ਕਹਿੰਦਾ ਬੜ ਭਾਗੀ फिर गुरुमुख ही प्रकट होवे जिना होर मखांदे हुंदे च दा प्रगट हो जांदा ओवट भागी जेडे सच नु प्रगट करदे दे संसार जिना द्वारा सच प्रगट हुंदा है शुद्ध सारवित ओ गुरुमुख पुट भागी जी मोहल्ला तीजा इन्द वर्षै कर दया लोका मन उपजे चाओ, जिस के इंद इन्द वर्षदा ਦੇਸ ਕੇ ਸਦ ਬਲਹਾਰੇ ਜਾਉ ਇਹ ਇੰਦਰ ਗੁਰਮੁਖ ਵਾਸਤੇ ਆਇਆ ਹੁਣ ਕਿੰਨੇ ਵਰਸਿਆਂ ਜਿਵੇਂ ਇੰਦਰ ਵਰਖਾ ਕਰਦਾ ਨਾ ਜੈਨਾਂ ਨੇ ਬਾਹਰ ਵਰਖਾ ਹੁੰਦੀ ਹੈ ਤੇ ਗੁਰਮੁਖ ਵੀ ਇਦਾਂ ਦਇਆ ਕਰਕੇ ਵੀ ਲੋਕਾਂ ਦੇ ਹਿਰਦੇ ਛੁੱਟੇ ਹੋਣ ਚੱਲਦੇ ਚੱਲਣ ਦਾ ਰਖਲਾ ਆਪਣੀ ਕਿਰਪਾ ਦਾ ਇਹ ਦਇਆ ਕਰਕੇ ਉਹ ਦਿਆ ਕਰਦੇ ਨੇ ਉਹਨਾਂ ਦੇ ਥਰੂ ਪਰਮੇਸ਼ਰ ਸੇ بارش ਕਰਦਾ ਕਰਦਾ ਆ ਲੋਕਾਂ ਨੂੰ ਜਿਹੜੇ ਚਾਹੋ ਸੋਡ ਦੇ ਚਾਹੋ ਅੱਤਰ ਹੁੰਦਾ ਵੀ ਆ ਆਈਏ ਬਾਣੀ ਇਹ ਠੀਕ ਹੈ ਇਹ ਸੱਚੀ ਹੈ ਆਪਾਂ ਕਰਮਾ ਕਰਿਆਂ ਐ ਸਮੇਂ ਦੇ ਵਿੱਚ ਆਪਾਂ ਸੁਖ ਜਾਂਦੇ ਉਹਨਾਂ ਦੇ ਮਨ ਵਿੱਚ ਚੋਪ ਜਿਹਾ ਜਿਸਕੇ ਹੁਕਮ ਹੀ ਜਿੱਦ ਵਰਸਦਾ ਜਿੱਦ ਕਿਹੜਾ ਉਹ ਤਾਂ ਬੁਲਾਇਆ ਬੋਲਦਾ ਇੱਧਰ ਆਪਲੀ ਬੋਲਦਾ ਸਰਗਤਾ ਬੁਲਾਇਆ ਬੋਲਦਾ ਬੁਲਾਉਣ ਵਾਲਾ ਗੁਰੂ ਹੈ बोलण वाला इजदा तिन वर्ष ਦਾ ਇਸ ਕੈ ਫਲ ਬਲੇਹਾਰੇ ਜੋਂ ਪਰਿਆਰੇ ਤਾਂ ਉਹਦੇ ਆਂ ਜੀ ਦੇ ਹਕੂਮਾ ਵਰਸਦਾ ਬੋਲਣ ਵਾਲੇ ਦੇ ਬਲੇਹਾਰੇ ਆ ਬੋਲਣ ਵਾਲੇ ਦੇ ਬਲੇਹਾਰੇ ਬੁਲਾਉਣ ਵਾਲੇ ਦੇ ਜਦ ਬੁਲਾਉਣ ਵਾਲਾ ਆ ਗਿਆ ਫਿਰ ਬਲੇਹਾਰੇ ਬੁਲਾਉਣ ਵਾਲੇ ਦੇ ਇਹ ਸ਼ਬਦ ਗੁਰੂ ਹੈ ਸ਼ਬਦ ਗੁਰੂ ਠੀਕ ਹੈ ਗੁਰਮੁਖੀ ਸ਼ਬਦ ਸਮਾਲੀ ਹੈ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਓ ਗੁਰਮੁਖੀ ਸ਼ਬਦ ਆ ਜਿਹੜਾ ਗੁਰਮੁਖੀ ਗੁਰਮੁਖਾਂ ਆ ਗੁਰਬਾਣੀ ਸਮਾਲੀ ਆ ਤੇ ਗੁਰਮਖਤਾ ਦੇ ਸ਼ਬਦ ਦੇ ਵਿੱਚ ਸਮਾਏ ਹੋਦੇ ਗੁਣ ਗਾਓ ਗੁਰ ਕੀ ਗਾਇਨ ਕਰਦੇ ਸੱਚੇ ਦਾ ਗੁਰਮੁਖ ਤਾਂ ਜਿਹੜਾ ਕੰਨਾਂ ਤੋਂ ਬਿਨਾਂ ਸੁਣਨ ਵਾਲਾ ਸ਼ਬਦ ਆ ਨਾ ਉਹ ਚ ਸਮਾਏ ਰਹਿੰਦੇ ਨੇ ਸਮਾਗ ਕੇ ਗੋਵਨ ਨੇ ਤੇ ਸਮਾਗ ਕੇ ਬੋਲਦੇ ਨੇ ਉਹਦੇ ਵਿੱਚ ਲੀਨ ਹੋ ਕੇ ਬੋਲਦੇ ਨੇ ਗੁਰਮੁਖੀ ਸ਼ਬਦ ਨੂੰ ਸਮਾਲ ਲਈਆਂ ਫਿਰ ਸੱਚੇ ਦੇ ਗੋਣ ਹੋਣੇ ਨੇ ਜਿਵੇਂ ਬਲਾਵਤ ਫਲਾਇ ਬੋਲਦੇ ਵੀ ਨਾ ਉਸ ਸ਼ਬਦ ਦੇ ਵਿੱਚ ਲੀਨ ਹੋ ਕੇ ਬੋਲਣੇ ਪੈਂਦੇ ਨਾਨਕ ਨਾਮ ਰੱਬ ਰੱਤੇ ਜੇ ਅਰਬੂਲੇ ਜਿਹੜੂ ਨੋਬਦਾਰਾਂ ਨੇ ਚੜ ਜਾਂਦਾ ਹੈ ਨਾ ਉਹ ਨਿਰਮਲੇ ਨੇ ਉਹਨਾਂ ਦੇ ਅੰਦਰ ਬਲਾੜੀ ਨਹੀਂ ਹੁੰਦੀ ਉਹ ਬਲੀਨ ਤਰ੍ਹਾਂ ਅਖੇਦਲੀ ਬੋਲਦੇ ਸੱਚ ਬੋਲਦੇ ਨੇ ਸੱਚ ਬੋਲਣ ਵਾਸਤੇ ਮੈਂ ਤੁਹਾਨੂੰ ਦੂਰ ਕਰਦੀ ਕੁ ਆਹ ਲੱਖ ਸੱਚੀ ਬੋਲਿਆ ਜਾ ਸਕਦਾ ਹੈ ਜੋ ਸੱਚ ਸੋ ਠਿਕੇ ਹੋਏ ਸੱਚ ਤੁਹਾਰੇ ਤਾਂ ਸੱਚ ਟਿਕੜੂ ਗਾ ਜੇ ਅਫਦ ਟਿਕਿਆ ਬੋਲ ਟਿਕਿਆ ਜਿਨਾਂ ਸੱਚੀ ਬੋਲਿਆ ਜਾ ਸਕਦਾ ਲੋ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰੇ ਕਰਮ ਧਿਆਇ ਪੂਰਾ ਸ਼ਬਦ ਮਨ ਵਸਾਇਓ ਪੂਰਾ ਖਲਕੋ ਸੇਵ ਸਤਗੁਰ ਪੂਰਾ ਕਰਦਾ ਜਦ ਗੁਰਦੇਵ ਨੇ ਆਪਣਾ ਬੁੱਧ ਜਿੱਤ ਲਿਆ ਪੂਰਾ ਸਤਗੁਰ ਹੋ ਗਿਆ ਪੂਰੇ ਗੁਰ ਕਾ ਉਪਦੇਸ਼ ਹੈ ਗੁਰਬਾਣੀ ਪੂਰੇ ਗੁਰ ਕਾ ਸਰੂਪ ਦੇਦ ਬੁੱਧੀ ਬੋਲਦੀ ਹੈ ਹੁਣ ਇਹ ਬੋਲਦੀ ਹੈ ਬੁੱਧੀ ਪੂਰਾ ਸਤਗੁਰ ਸੇਵ ਐਸ ਪੂਰੇ ਸਤਗੁਰ ਦੀ ਸੇਵ ਕਰਨੀ ਚਾਹੀਦੀ ਹੈ ਮੈਂ ਤਾਂ ਪਹਿਲਾਂ ਮਨ ਦੀ ਮਗਲ ਕੇ ਮੰਦੀ ਉਸੇ ਵਗਰ ਨਹੀਂ ਉਹ ਤਾਂ ਕੋਈ ਫਾਇਦਾ ਨਹੀਂ ਮਿਲਿਆ ਨੁਕਸਾਨ ਹੋ ਜਾਣਾ ਸੀ ਜਦ ਪਦਾਰ ਐਵੇਂ ਜਦ ਜੂਏ ਹਾਰਿਆ ਜਾਣਾ ਸੀ ਸੱਚੀ ਮਿਹਰਬਾਨੀ ਦੇ ਵਿਚਾਰ ਤੇ ਪੂਰਾ ਸਤਪੁਰਸ਼ ਇਹ ਪੂਰਾ ਪਾਇਆ ਪ੍ਰਾਪਤਿਕਾ ਨਹੀਂ ਹੋਈਏ ਪੂਰੇ ਗਿਆਨ ਦੀ ਪ੍ਰਾਪਤੀ ਹੋ ਗਈ ਬਵੇਕ ਬੁੱਧੀ ਹੋ ਗਈ ਪੂਰੇ ਦਾ ਪੂਰਾ ਗਿਆਨ ਬਣ ਗਿਆ ਤੇਨ ਲੋਕ ਦਾ ਗਿਆਨ ਸਮਝ ਆ ਗਿਆ ਜਿਵੇਂ ਤਾਰੂ ਪਰ ਆਕਾਸ਼ ਨਾਲ ਚਰਨ ਹੋ ਗਿਆ ਫਿਰ ਗਿਆਨ ਦੀ ਕਿ ਉਹਦੇ ਪ੍ਰਗਾਮ ਜਿਵੇਂ ਪੂਰੇ ਦਾ ਪੂਰਾ ਗਿਆਨ ਹੋ ਗਿਆ ਚਰਨ ਹੋ ਗਿਆ ਪੂਰੇ ਕਰਮ ਤੇ ਪੂਰੇ ਪਰਮ ਵੀ ਪੂਰੇ ਪੂਰੀ ਕਿਰਪਾ ਤਾਂ ਗਿਆਨ ਚੁੜਿਆ ਤਾਂ ਗਿਆਨ ਤੇ ਪੂਰਾ ਸ਼ਬਦ ਮਨ ਬਤਾਇਆ ਪੂਰਾ ਸ਼ਬਦ ਥੀਜਿਆ ਗੁਰਬਾਣੀ ਪੂਰੇ ਗੁਰ ਕਾ ਬਿਦੇਸ ਬੁਝ ਗਿਆ ਹਾਂ ਹਾਂਜੀ ਪੂਰੇ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨੁਆ ਨਾ ਆਇਆ ਪੂਰੇ ਗਿਆਨ ਨਾਲ ਧਿਆਨ ਕੇ ਗਿਆਨ ਪੂਰਾ ਹੋ ਗਿਆ ਨੂੰ ਕੋਈ ਭੁੱਖ ਕਿਸ ਕਿਤੇ ਵੀ ਕੋਈ ਝੇੜਾ ਨਹੀਂ ਰਿਹਾ ਫਿਰ ਤੇ ਧਿਆਨ ਟਿਕ ਬਚਣਾ ਕਿ ਨੇਰਾ ਉਹਨੇ ਕਿ ਟਿਕੇ ਵੀ ਕਿਉਂ ਕੁਛ ਸਵਾਲ ਲੈ ਉਹਨਾਂ ਦੇ ਜਵਾਬ ਚਾਹੀਦੇ ਨੇ ਉਹ ਜਾਣਕਾਰੀਆਂ ਚਾਹੀਦੀ ਹੈ ਬੁੱਧੀ ਟਿਕ ਫਿਰਦਾ ਟਿਕਦਾ ਟੋਲਦਾ ਫਿਰਦਾ ਉਹਨੇ ਹੈ ਸਹਿਲ ਦੀ ਮਾਇ ਹੁੰਦੀ ਹੈ ਨੇਰਾ ਹੁੰਦਾ ਜੋ ਦੂਰ ਹੋ ਜਾਂਦਾ ਹਰ ਸਰ ਤੀਰਥ ਜਾਣ ਲਈ ਹਰ ਸਰ ਤੀਰਥ ਜਾਣ ਲਿਆ ਅੰਦਰ ਹੀ ਹੈ ਤੀਰਥ ਹਰ ਜਿਹੜਾ ਹੈਗਾ ਉਹੀ ਤਾਂ ਤੀਰ ਸ ਹੈ ਉਹੀ ਸਰੋਵਰ ਹੈ ਹਰੀ ਸਰੋਵਰ ਹੈ ਉਹੀ ਤੀਰ ਸ ਨਾਲ ਉੱਥੇ ਹੀ ਨਾ ਹੋਣਾ ਨਾਲ ਉਹਦੇ ਵਿੱਚ ਹੀ ਸਮਾਉਣਾ ਹੋਣਾ ਜਾਣੀ ਬਨਵਾ ਨਾ ਆ ਬਨ ਰਤਾ ਕੋੰਤ ਹੋਤਾ ਹੈ ਹਰ ਦੇ ਨਾਲ ਜੋੜ ਕੇ ਸ਼ਬਦ ਮਰੈ ਮਨ ਮਾਰ ਤਨ ਜਣੇ ਮਾਇਆ ਦਰ ਸੱਚੇ ਸੱਚਾ ਆਇਆ ਸ਼ਬਦ ਮਰੈ ਆਪਦੇਸ਼ ਨਾ ਮਰਦਾ ਸ਼ਬਦ ਮਰੈ ਵਾਂਡੂ ਸ਼ਬਦ ਦਾ ਨਾਮ ਮਰਦਾ ਮਾਰੇ ਤਦ ਜਿਹੜੇ ਦੀ ਮਾਇਆਾਰੇ ਜਿਹਨੇ ਮਾਰਿਆ ਹਰ ਉਹ ਭਾਈ ਇਹ ਤਦ ਜਿਹੜੇ ਉਹ ਜਨਮ ਦੰਦੀ ਆ ਗੁਰਮਤ ਉਹ ਤਦ ਐਸੀ ਮਤ ਐਸੀ ਮਤ ਤਦ ਜਿਹੜੇ ਨੂੰ ਮਾਰਿਆ ਜਿਹਨੇ ਉਪਦੇਸ਼ ਦਿੱਤਾ ਹੈ ਜਿਹਦੇ ਨੂੰ ਮਾਰਿਆ ਉਪਦੇਸ਼ ਨਾ ਮੰਨ ਮਰਿਆ ਆਤਮਾਤਾ ਨੇ ਗੁਰਮਤਿ ਨੂਰ ਦੇ ਉਸਤ ਗੁਰਮਤਿ ਨੂਰ ਚ ਕਿਹਾ ਦਿੱਤੀ ਜੀ ਬ विवेक बुद्धि ਤਾਂ ਨਾ ਬ ਦਾ ਉਦੇਸ਼ ਹੈ ਸਰ ਸੱਚੇ ਸਤਿਆਰ ਸੱਚ ਆਇਆ ਸੱਚੇ ਦਰ ਤੇ ਸਤਿਆਰ ਹੋ ਕੇ ਹੀ ਸੱਚਾ ਹੋ ਕੇ ਬੰਦੂ ਕਾ ਆ ਸਕਦਾ ਹੈ ਦਾ ਖੋਟਾ ਪਾਰ ਛੋੜ ਦਿੰਦੇ ਨੇ ਸੱਚੇ ਦਰ ਤੇਗਾ ਸਤਿਆਰ ਹੋ ਕੇ ਆਇਆ ਤਾਂ ਅੰਦਰ ਬਾਲ ਲਿਆ ਸੱਚਾ ਆਇਆ ਉੱਧਰ ਆ ਗਿਆ ਤੇਰੀ ਮਿਲ ਗਈ ਬਲ ਤੇਰੀ ਜੀ ਮਿਲਣੀ ਕਰ ਸਕੇ ਜਾ ਸਕਦਾ ਸੀ ਜੇ ਸਚਿਆਲ ਨਾ ਹੁੰਦਾ ਇਟਰੀ ਨਹੀਂ ਬਣਦੀ ਫਿਰ ਬਾਹਰ ਸੱਜਦੇ ਤਾਂ ਆਇਆ ਤੇ ਅਗਿਆ ਸੋਝ ਕੁਛ ਨਾ ਸਕੇ ਕੋਈ ਜਾਂ ਖਸਮੇ ਸਲਾਹੇ ਕੋਈ ਨਹੀਂ ਕੋਈ ਦਰਦ ਖਜਾਨੇ ਚ ਵੀ ਕੀ ਨਾ ਤੈਨੂੰ ਭੇਜਿਆ ਇੱਥੇ ਤਾਂ ਖਸਮੇ ਪਾਇਆ ਜਾਂ ਖਸਮ ਦੇ ਪਿੱਛਾ ਨਾਲ ਆਇਆ ਫਿਰ ਉਹਨਾਂ ਨੂੰ ਪਤਾ ਵੀ ਗੇਟ ਤੇ ਬੰਦ ਨਹੀਂ ਦਿੰਦਾ ਫਿਰ ਬੈਠਿਆ ਖਦਮ ਉੱਥੇ ਉਹ ਤਾਂ ਸੌਕੇ ਤੇ ਪੂਰਾ ਲਾਗ ਜ ਆਉਣ ਦਾ ਨੇ ਤੇ ਇਹਦੀ ਅੰਦਰ ਕੋਈ ਪੁੱਛਦਾ ਵੀ ਕਿਥੋਂ ਆਇਆ ਕੀ ਗੱਲ ਹੈ ਉਹ ਤੇ ਅੰਦਰ ਅਰਦਾਸ ਕੋਈ ਪੁੱਛਦਾ ਇੱਛਾ ਨਾਲ ਜਲਤਾ ਦੇ ਕੇ ਆ ਪਾਇਆ ਨਾਨਕ ਅਨ ਸੱਚ ਦੀ ਸਲਾਹ ਕੰਨੀ ਚਾਹੀਦੀ ਹੈ ਜੇ ਰੱਬ ਦੀ ਸਲਾਹ ਕਰਦੇ ਨੇ ਉਹਨਾਂ ਨੂੰ ਬੁਣਿਆ ਸੀ ਸਲਾਹ ਕਰਨ ਦੀ ਇੱਛਾ ਸੀ ਨਾਨਕ ਦੀ ਇੱਛਾ ਸੀ ਸਲਾਹ ਕਰਨ ਦੀ ਤਾਂ ਨੇ ਪ੍ਰਾਪਤ ਕੀਤੀ ਹੈ ਉਹਨੂੰ ਸੱਚ ਦੀ ਸਲਾਹ ਕਰਨ ਦੀ ਜਿਹੜੀ ਹੈ ਉਹ ਜੀ ਇਹ ਸ਼ਕਤੀ ਮਿਲੀ ਹੈ ਪਰਮੇਸ਼ਰ ਦੇ ਕਰੋਂ ਕਿਉਂਕਿ ਉਹਦੇ ਲਿਖਿਆ ਹੋਇਆ ਸੀ ਇੱਛਾ ਸੀ ਜੀ ਇੱਛਾ ਉਹਦੇ ਨੂੰ ਬਣਨ ਦਾ ਹਾਂਜੀ ਠੀਕ ਹੈ ਜੀ ਇੱਥੇ 18ਵੀਂ ਸਮਾਪਤੀ ਹੈ ਜੀ